ਜਿੰਤੇ ਜੇ ਘਟ ਵਿੱਚ ਚਰਨਾਰ ਬਿੰਦੂ ਬਸਦਾ ਜੇ ਘਟ ਵਿੱਚ ਸ਼ਬਦ ਗੁਰੂ ਬਸਦਾ ਹੈ ਪ੍ਰਗਟ ਹੈ ਤਾਂ ਗੁਪਾ ਤਾਰਾ ਸੋ ਨਰ ਜਪ ਸਕਦੇ ਸਮਝੋ ਸਤਿਦਾ ਜਦੋਂ ਬਾਣੀ ਉਚਾਰਨੀ ਹੈ ਨਾ ਇਹ ਵੀ ਜਪ ਕੇ ਉਚਾਰਨ ਹੋਣੀ ਹੈ ਤਾਂ ਜਦੋਂ ਮੱਖਣ ਤੋਂ ਦੁੱਧ ਬਣਾਉਣਾ ਨਾ ਇਹ ਵੀ ਇਹ ਵੀ ਸਮਝ ਕੇ ਹੀ ਹੁੰਦਾ ਰਸਨਾ ਜਪੇ ਗੋਪਾਲ ਰਸਨਾ ਬਰੰਦਲੀ ਹੋ ਜਾਂਦੀ ਹੈ ਫਿਰ ਬਾਹਰ ਲੀਂਦੇ ਹਾਂ ਜੀ ਸਰੀਰ ਤਾਂ ਨਿਰਾਕਾਰੀ ਹੈ ਉਹ ਅੰਦਰਲੀ ਸਮਝ দিয়ে ਗੋਪਾਲ ਦੀ ਗੱਲ ਨੂੰ ਸਮਝ ਕੇ ਗਾਹ ਸਮਝਾਉਂਦੀ ਹੈ ਆਪ ਜਪਾ ਨਾਮ ਦਾ ਅਬਰਾ ਨਾਮ ਜਪਾ ਆ नाम ਜਿਹਾ ਹੋਇਆ ਹੈ ਆਪ ਤਾਂ ਅੰਦਰੋਂ ਜਾ ਪਿਆ ਹੈ ਇਹ ਕੀ ਕਿਵੇਂ ਕਹਿਣਾ ਇਹ ਗੱਲ ਨੂੰ ਬਿਆਨ ਕਿਵੇਂ ਕਰਨਾ ਅਕਥ ਕੀ ਕਰਾਂ ਕਹਾਣੀ ਆਓ ਸੰਤ ਪਿਆਰਿਓ ਅਕਥ ਕੋਈ ਗੱਲ ਕਹਿਣ ਤੋਂ ਪਹਿਲਾਂ ਵੀ ਸਮਝ ਕੇ ਕਹਿ ਦਿੰਦੀ ਐ। ਇਹ ਐਸ ਤਰੀਕੇ ਨਾਲ ਚੱਲੀ ਹੋਈ ਐ ਗੱਲ ਦਾ। ਉੱਤੋਂ ਥੱਲੇ ਨੂੰ ਆਈ ਹੋਈ ਐ। ਨਾ ਇਹਨੂੰ ਸਮਝਦੇ ਆ ਤਾਂ ਥੱਲੇ ਉੱਤਰ ਜਾਂਦੇ ਆ। ਤੇ ਜਾਂ ਮੀਂਹ ਪੈਂਦਾ ਉੱਤੋਂ ਥੱਲੇ ਨੂੰ ਆਉਂਦਾ। ਬਾਰਿਸ਼ ਆ ਪੈਂਦੀ ਐ ਫਿਰ ਤਾਂ ਉੱਤੋਂ ਥੱਲੇ ਨੂੰ ਹੋ ਜਾਂਦਾ। ਹੁਣ ਉੱਤੋਂ ਥੱਲੇ ਨੂੰ ਆਏ ਹੋਇਆ। ਉਦੋਂ ਨਹਾਮਾਇ ਨਾਮ ਤੋਂ ਡਾਇਰੈਕਟਰ ਇਹ ਕਰਨਾ ਨਾ ਸੁਣਨ ਵਾਲੀ ਜਿਹੜੀ ਬਾਣੀ ਬਣਾਈ ਹੈ ਕਹਾਣੀ ਕਥੀ ਹੈ ਫਿਰ ਅਸਨਾ ਜਗੇ ਕੋ ਪਾਲ ਨਾਨਕ ਸੋ ਪ੍ਰਭ ਸਿਮਰੀਐ ਕੋ ਪਾਲ ਸੋ ਪ੍ਰਭ ਸਿਮਰੀਗੇ ਨਾਨਕ ਜਿਸ ਤੇrnaਹੀ ਜਿਸ ਤਨ ਬਾਣੀ ਵਿਸਰ ਜਾਏ ਸਾੜੇ ਪੱਕਾ ਹੋ ਗਈ ਜੋ ਪੱਕਾ ਹੋ ਗਈ ਤੇ ਚਿਤ ਵਿਸਰ ਗਈ ਵਿਸਰਤੀ ਹੋ ਗਈ ਉਹ ਉਸੇ ਸੇਵਲਨ ਕੀ ਹੈ ਸੋਪਨ ਬਸੰਰੀ ਹੈ ਜੋ ਜੀ ਸਭੀ ਭੁੱਲ ਗਈ ਉਹਨਾਂ ਚਾਹਤ ਕਰ ਤਿਸ ਹੈ ਤਿਸ ਦੇਹੀ ਕੋ ਜਿਹੜੀ ਅੰਦਰਲੀ ਦੇਹੀ ਹੈ ਇਹਦੀ ਪਾਲਣੋਂ ਦੇ ਨਾਲ ਵਾਲੀ ਦੇਹੀ ਜਿਹੜੀ ਤੇਹੀ ਸਿਮਰਦੀ ਹੈ ਜਿਹੜੀ ਦੇਹੀ ਨੂੰ ਰਸਉਦਾ ਉਹਦੀ ਪਾਲਣੋਂ ਦੇ ਨਾਲੇ ਉਹਦਾ ਫਿਰ ਆਧਾਰ ਉਹੀ ਬਣ ਗਿਆ ਨਾਮ ਨਾਮ ਆਧਾਰ ਆਧਾਰ ਕੀ ਬਣ ਗਿਆ ਨਾਮ ਖਾਣਾ ਕੀ ਬਣ ਗਿਆ ਸੱਚ ਖਾਣਾ ਸੱਚ ਖਾਣਾ ਸੱਚ ਬਣ ਗਿਆ ਰਸ ਕੀ ਬਣ ਗਿਆ ਨਾਮ ਦੰਕੀ ਬਣ ਗਿਆ ਨਾਮ ਸਭ ਕੁਝ ਨਾਮੇ ਬਣ ਗਿਆ ਪਦਾਰ ਨਾਮੇ ਬਣ ਗਿਆ ਪਾਲਣ ਪਾਲਣ ਪੋਸ਼ਣ ਲੋਗਦੇ ਹੋਗੇ ਸਾਰੇ ਉਹ ਦੇਖੀ ਬਾਇ ਮਾਇਆ ਤੋਂ ਪਾਲਣ ਪੋਸ਼ਣ ਤੇਲੀ ਦੇ ਸਾਤ ਸੁਪਰ ਸਾਚੇ ਰੋ ਪਾਲਣ ਪੋਸ਼ਣ ਉਹ ਦੇਖੀ ਪਾਲਣ ਕਰ ਐਸਟ੍ਰਿਕ ਕਰ ਉਹਦੇ ਸੇਵਨ ਡੋੜੇ ਦੀ ਪਾਲਣ ਕੌੜੀ ਸ਼ਬਦ ਨਾਲ ਜੁੜ ਕੇ ਇਹ ਕਹ ਲਓ ਸ਼ਬਦ ਨਾਲ ਜੁੜੇ ਰਹਿ ਨਾਲ ਜਿੰਨਾ ਚਿਰ ਜੁੜਿਆ ਰਹੂਗਾ ਉਨਾ ਚਿਰ ਇਹ ਨਹੀਂ ਪਲਦੀ ਜੇ ਇਹ ਨੂੰ ਕਰਨ ਦੀ ਸੈਂਸ ਫਸਲ ਪਾਲ ਰੱਖਣਾ ਠੀਕ ਠਾਕ ਰੱਖਣਾ ਠੀਕ ਠਾਕ ਜਿਹੜਾ ਘਟ ਰੂਥੇ ਰੁਕ ਗਈ ਜਿਹੜਾ है? ਰੂਥੇ ਚ ਨਾਲ ਵਿਦਾ ਉਹੀ ਪ੍ਰਭਾ ਹਾਂ ਵਈ ਪ੍ਰਭਾ ਇਹ ਜਿਹਦੇ ਚੜ੍ਹ ਨਾਲ ਜੁੜਨਾ ਹੈ ਜਿਹਦੇ ਸ਼ਬਦ ਨਾਲ ਜੁੜਨਾ ਪੌੜੀ ਆਪੇ 68 ਤੀਰਥ ਕਰਤਾ ਆਪ 68 ਤੀਰਥ ਔਰਦੇ ਕਿਉਂਕਿ ਜਦੋਂ ਇਹ ਆਪੇ ਸ਼ਬਦ ਵ ਬੇਚਕਾਉਣ ਬੜੇ ਜਿਹੜਾ ਵੀ ਉਹ ਹੀ ਬੜੇ ਤਾ ਅਸਲ ਵਿੱਚ ਕੀ ਹੋਇਆ ਜਿਹੜਾ ਉਹ ਸ਼ਬਦ ਹੈ ਜਿਵੇਂ ਉਹ ਬੋਲਦਾ ਬੋਲਦਾ ਆ ਵਿੱਚ ਜੇ ਤੂੰ ਮੇਰਾ ਹੋ ਰਹੇ ਸਮਝ ਕਿ ਤੇਰਾ ਸੁਰ ਹੋ ਗਿਆ ਹਣ ਸੰਸਾਰ ਨਾਲ ਹੋ ਗਈ ਨਾਲ ਬੋਲਣ ਲੱਗ ਗਿਆ ਉਹਨ ਬੈਰਾਗ ਛੱਡ ਦਿੱਤਾ ਰਾਗੀ ਹੋ ਗਿਆ ਮੈਨੂੰ ਬੈਰਾਗ ਹੋਇਆ ਬਾਈ ਆਦੀ ਬੋਲੀ ਬੋਲਦਾ ਸੀ ਹੂੰ ਤੇ ਛੱਡ ਤੀ ਉਹ ਬੋਲੀ ਬੋਲਣ ਲੱਗਿਆ ਸੱਚ ਕਰਨ ਵਾਲੀ ਮਾਨ ਕਿਉਂ ਬੈਰਾਗ ਕਰੇਗਾ ਸਤਗੁਰ ਮੇਰਾ ਪੂਰਾ ਬੈਰਾਗੀ ਨਹੀਂ ਰਿਹਾ ਬੈਰਾਗੀ ਜੇ ਨਾ ਜੈ ਬੈਰਾਗੀ ਜਦ ਆ ਬੋਲੂ ਨਾ ਯਾ ਉਹ ਜਿਹੜੀ ਧਰੋ ਆਈ ਹੈ ਉਹ ਉਹਦੀ ਸੱਚ ਬੋਲੂ ਰਾਗੀਓ ਗਿਆ ਰਾਗੀ ਕਿਤੇ ਹੋ ਰਾਗੀ ਨਾ ਇਹ ਪਰ ਕੀਰਤ ਨਹੀਂ ਹੋ ਗਿਆ ਅਸਲ ਤੇ ਆਗੀ ਆ ਕੀਰਤੀ ਆ ਹੈ ਗਵਈਆ ਬਣ ਗਿਆ ਕਵੀ ਬਣ ਗਿਆ ਕبھی ਵੀ ਕਹਿ ਲੈਣਾ आपे 68 ਤੀਰਥ करता ਆਪ ਕਰੇ ਇਸ਼ਨਾਨ ਜਿਹੜਾ ਅੱਦਲਾ ਸੀ ਉਹਨ ਕਰਤਾ ਕਿਹਾ ਇਹਦਾ ਕਰਤਾ ਨਾਉਨ ਆਇਆ ਕਿ ਕਰਤਾ ਤੇ ਕਿਰਿਆ ਦੀ ਸੈਂਸ ਆ ਗਈ ਤੀਰਥ ਕਰਤਾ ਨਹੀਂ ਨਹੀਂ ਆਪੇ 68 ਤੀਰਥ ਕਰਤਾ ਆਪ ਕਰੇ ਇਸ਼ਨਾਨ ਇੱਕ ਤਾਂ ਕਰਤਾ ਵੀ ਕਰਤਾ ਅੰਦਰ ਦਾ ਤੀਰਥ ਸ ਵੈਸੇ 68 ਲਗਦਾ ਫੈਰੀ ਹੈ ਹਾਂਜੀ ਉਦੋਂ ਸਾਰੇ ਆਉਂਦੇ ਇਸ ਰਹੀਆਂ 68 ਤੇ ਐਵੇਂ ਆਊਗਾ ਅਸੀਂ 868 ਕਰ ਲਿਆ ਉਹਦਾ ਛੱਡਦਾ ਉਥੇ ਆਊਗਾ ਫਿਰ ਚਾਹੀਦਾ ਇਹਨਾਂ ਨੇ ਗਲਤ ਕੀਤਾ ਫਿਰ ਜਿਹੜੇ ਇਹਨਾਂ ਦੇ ਗਰੰਧਾ ਜੜ ਲਿਖੇ ਹੋਏ ਨੇ ਉੱਤੇ ਜ਼ਿਆਰੀ ਹੈ ਨਹੀਂ ਇਹਨਾਂ ਦਾ ਨਫਤ ਬਤਨਉਂ ਚਾਹੀਦਾ ਸੀ ਕਿਉਂ ਵਰਤਦੇ ਤੇ ਜ਼ਿਆਰੀ ਉਹਨਾਂ ਦੇ ਗਰੰਧਾ ਦੇਖੋ ਜਿੱਥੇ ਜ਼ਿਆਰੀ ਹੈ ਤਾਂ ਤਾਂ ਜ਼ਿਆਰੀ ਲੱਗੂਗੀ ਉਹਨਾਂ ਦਾ ਨਹੀਂ ਲੱਗ ਰਹੀ ਗਲਤ ਲਾਈ ਹੈ ਉਹ ਪਿੱਛੋਂ ਇਹਨਾਂ ਨੇ ਲਾਤੀ ਹੋਣੀ ਬਾਹਰ ਵਾਲਿਆਂ ਨੇ ਵੀ ਉਹ ਵੀ ਜ਼ਿਆਰੀ ਉਹ ਵੀ ਇੱਥੇ ਜੇ ਇੱਥੇ ਵੀ ਜਾਈ ਅਡਰ ਨਾਲ ਦਾ ਪਤਾ ਨਹੀਂ ਇੱਥੇ ਸਹੀ ਹੈ ਕਿ ਸੈਰੀ ਇੱਥੇ ਠੀਕ ਹੈ ਅਰਥਾਤ ਹਾਂ ਇੱਥੇ ਤਾਂ ਰਹੀ ਹੈ ਹਮ ਆਪੇ ਜਦੋਂ ਇਹ ਅਠਾਂ ਗੋਲਾਂ ਦੇ ਵਿੱਚ ਇਹ ਆਪੇ ਹੀ ਤੀਰਥ ਬਣਿਆ ਹੋਇਆ ਕੀ ਹੈ ਆਪੇ ਤੀਰਥ ਆਪੇ ਅੰਮ੍ਰਿਤ ਸਰੋਵਰ ਕਹਿੰਦਾ ਸਤਗੁਰੂ ਨੂੰ ਯੂਤ ਆਬੇ ਜੇ ਸਤਗੁਰੇ تیر ਤੋਂ ਕੇ ਨੂੰ ਜਾਂ ਸਤਗੁਰ تیر ਤੇ تیر ਟਾਪੇ ਸਿਰਫ ਸੁਰਤ ਕਪੜੇ ਅੰਦਰ ਜੁੜੀ ਰਹਿੰਦੀ ਹੈ ਕੁਝ ਨਹੀਂ ਉੱਥੇ ਕਾ 68 ਤੀਰ ਤੋਂ ਗੁਰ ਘਰੇ ਦਿਖਾਇਆ ਘਰੇ ਦੇ ਵਿੱਚ 68 ਤਾਉ ਘਰੇ ਦਿਖਾਇਆ 68 تیر ਤੋਂ ਗੁਰੂ ਘਰੇ ਦਿਖਾਇਆ ਫੇ ਉੱਥੇ 86 ਠਾੜਾ ਬਿਠਾੜ ਹਾਂ ਠਾੜੇ ਜਿਹੜੇ ਗੱਲ ਰਹੀ ਦੁਬਾਰ ਮੰਦਦੇ ਨੇ ਅੰਦਰ ਨੇ ਉਹ ਆਪਰ ਹਾਏ ਰੱਖੇ ਨੇ ਸਾਰੇ ਮੈਂ ਵੀ ਆਏ 86 ਨੇ ਆਏ ਨੇ ਉਹਨਾਂ ਨੇ ਜੇ ਅਮਰਸਾਰਾ ਕਿ ਕਿ ਹੱਥ ਹੋਇਆ ਉੱਥੇ ਕਿ ਗਿਰਦਾਵਰ ਹੋ ਵੀ ਅੰਦਰ ਨਹੀਂ ਅੰਦਰ ਉੱਥੇ ਤਾਂ 68 ਆਉਂਦੇ ਗੇਂਗਪੁਰਾ ਦਾ ਵੀ ਅੰਦਰ ਹੈ ਮੇਰੇ ਉੱਪਰ ਹੈ ਤਾਂ ਵੀ ਅੰਦਰ ਸਾਰੇ 2 ਫਿਰ ਉਹ ਤੇ 9 ਗੁਣ ਵੱਜ ਕੇ ਉਹ ਤੀਰਥ ਇੱਕੋ ਤੀਰਥ ਅਰਥ ਲਿਖਣ ਦੇ ਜੇ 9 ਲੱਗੇ ਤਾਂ ਉਹਦਾ ਜਿਹੜਾ ਅਰਥ ਬਣਦਾ ਉਸੇ ਤੀਰਥ ਦਾ ਰੋਲ ਨੇ ਇੱਕ ਬਣਦਾ ਵੀਰ ਤੇ ਕੋਈ ਹੈ ਨੌ ਦੇ ਜਾਏ ਜਾਓ ਹੋਰ ਜਾਓ ਪਿਠਾੜ ਦੇ ਢਾੜੋ ਘਰੇ ਹੀ ਦਿਖਾ ਦੇ ਵੀ ਘਰੇ ਅੰਦਰ ਤੀਰਥ ਹੈ ਅੰਦਰ ਢਾੜ ਨਹੀਂ ਹੁੰਦਾ ਅੰਦਰ ਆਊਗਾ ਵੀਰ ਜੀ ਆੜਤੀਰਤ ਬਾਹਰ ਨਹੀਂ ਸੀਗੇ ਅੰਦਰ ਇਹਦਾ 268 ਨੇ ਕਿਉਂ ਕੈ ਵੀ ਦੰਦ ਨੇ ਹਰੀ ਕੇ ਹਜ਼ਾਰ ਦਾ ਅਸਲ ਜੋ ਤੀਰਥ ਨਹੀਂ ਹੈਗੇ ਤੀਰਥ ਇਹ ਹੈ ਹਾਂ ਹਾਂ ਨਾ ਹੈ ਉਹ ਤਾਂ ਤੀਰਥ ਨਹੀਂ ਹੈ ਤੀਰਥ ਉਹਦਾ ਇਹ ਕੋਪ ਪੰਨਤ ਜੀ ਆ ਗਏ ਭਾਈ ਸੀ ਇਹ ਅੱਛਾ ਪਈ ਇਹਦੇ ਸ਼ਲੋਕ ਦੇ ਅਸਰ ਦੱਸੋ ਹਮ 8 10 ਦੀ ਇਸਤਰੀ ਹੈ 13 ਇਸਤਰੀ ਹੈ ਤ੍ਰਿਆ ਦੋ ਤੀਏ ਬਣ ਜਾਇਆ ਤ੍ਰਿਆ ਤੋਂ ਜਦ ਦੋਈ ਭਾਸ਼ਾ ਬਣੇ ਤ੍ਰਿਆ ਤਾਂ ਸੰਸਕ੍ਰਿਤ ਦਾ ਲੱਭ ਜਗਾ ਤੇ ਤ੍ਰਿਆ ਜਦ ਬੋਲੀ ਬਣ ਗਈ ਸੀ ਪਾਲੀ ਸਾਹਿਬ ਬੋਲੀ ਬਣ ਗਈ ਸੀ ਫਿਰ ਬਾਅਦ ਵਿੱਚ 8 10 ਕੀ ਹੈ 18 ਉਹਨੇ ਜਨਮਾਰ ਕੀਤਾ ਹੈ 16 ਸਾਲ ਦੀ ਹੈ 16 ਜਨਮਾਰ ਕੀਤਾ ਹੈ ਇਹ ਹੈ ਉਹ ਇਹ ਆ ਉਹਦੇ ਤੇ ਸੀ ਸਮਝ ਗਏ ਅਗਵਾਈ ਬੁੱਧੀ ਕਰਦੀ ਹੋਵੇ ਜਿੱਥੇ ਬੁੱਧੀ ਦੀ ਅਗਵਾਈ ਹੈ ਉਥੇ ਦੀ ਜਿੱਤੇ ਮੰਦੀ ਹੋਈ ਹੈ ਉਤਕਰਤ ਜਾਂ ਵਰਬੂਰੇ ਹੋਗਾ ਬਲੀਂਤਾ ਵਧੂਗੀ ਜਾਂ ਬੁੱਧੀ ਦੇ ਰੋਸ਼ਨੀ ਚ ਮਨ ਚੱਲੂਗਾ ਉਹ ਨਿਰਵਨ ਹੁੰਦਾ ਚਲੇਗਾ ਬਗਏ ਬੁੱਧੀ ਦੀ ਰੋਸ਼ਨੀ ਜ਼ਰੂਰ ਚੱਲੂਗਾ ਕੱਕੇ ਮਰ ਗਿਆ ਪਿੱਛੇ ਲੱਗੂਗਾ ਤਾਂ ਉਹਨਾਂ ਮੁੱਢੀ ਚਿੱਤਰਾਂ ਜੁੜੀ ਬੜੇ ਭਾਈ ਕੇ ਜਲ ਸੰਗ ਰਹਤੀ ਤਬ ਉਹ ਰਿਆ ਇਹਨੇ ਇੱਕ ਨਾਲ ਜੁੜ ਕੇ ਰਹਿਣਾ ਉਦੀ ਚਾਹੇ ਕਿਤਰੋ ਜੁੜ ਕੇ ਰਹੇ ਚਾਹੇ ਮਰ ਰੋ ਜੁੜੇ ਜਦੋਂ ਮਰ ਪਿੱਛੇ ਲੱਗੂਗਾ ਫੇ ਚੀਤਾ रामचंद्र ਨਹੀਂ ਜੁੜਦਾ फेर रामचंद्र रा जुड़के सीधा रहोगी फेर ओ रहूंगा वर नु समझाऊगी बुद्धिओ सूरदा पड़ आवत दलका तरी सभी आवणा एना है, ओ अकलदाईये विषय अक्ली सतगुरु से भी अक्ली पाई है वा अक्ली पढ़ गए बुजिए अक्ली की ज्यादा ਦੌਲਤਾਂ ਕੇ ਰਾਏ ਹੋੁਰ ਗੁਰਦਾਜ ਇਹ ਤੀਰਤ ਜਦੋਂ ਇਹ ਪ੍ਰਸੀਧ ਕਰਦਾ ਨਾ ਬੁੱਧੀ ਦਿਖਵਾਈ ਚ ਅਗਲੀ ਕੀ ਜਾਦਾ ਅਗਲੀ ਬੜ ਕੇ 부ਜੀਏ ਇਹ ਜਿਹੜਾ ਰਾਏ ਤੀਰਤ ਰਾਤ ਦੀ ਅਗਵਾਈ ਤਾਂ ਮੇਰ ਸਰੀਰ ਦਾ ਇੱਕ ਰਾਤੇ ਕਰ ਰਸਮਾ ਹੋ ਰਾਤੇ ਦਿਖਵਾਈ ਬੁੱਧੀ ਕਰੀ ਉਹ ਵੇ ਬੁੱਧੀ ਕਰੀ ਆਤਮੈ ਸੰਜਮ ਵਰਤੈ ਸਵਾਮੀ ਆਪੇ ਜਪਾਇਆ ਨਾ ਆਪੇ ਸੰਜਮ ਵਰਤੇ ਸਭ ਆਪੇ ਜਪਾਇਆ ਨਾ ਸੰਜਮ ਜਿਹੜਾ ਹੈਗਾ ਆਪ ਵਰਤਦਾ ਥੋੜਾ ਥੋੜਾ ਥੋੜਾ ਥੋੜਾ ਥੋੜਾ ਥੋੜਾ ਥੋੜਾ ਥੋੜਾ ਥੋੜਾ ਥੋੜਾ ਕਰਕੇ ਬਦਲਾਅ ਲਿਆਉਣਾ ਆਪਣੇ ਰੱਬ ਚ ਇੱਕਦਮ ਬਦਲਾਅ ਜਿਹੜਾ ਲਿਆਉਣਾ ਬਲ ਜਿਹਨੇ ਕੰਮ ਘਾੜ ਕੇ ਚਲੇਗਾ ਜੋਗੀ ਜਦੋਂ ਗਾਜਰ ਉਹ ਤੱਕ ਬਾਹਰ ਬੰਦ ਸਦਰ ਸਵੇਰ ਕਰ ਸਮਝੋ ਤੁਸੀਂ ਇਹ ਮੰਨ ਲਓ ਵੀ ਇਹ ਜੰਗਲ ਹੈ ਘਰ ਜਿੱਥੇ ਬੈਠੇ ਹੋ ਕੱਜ ਵੀ ਉੱਥੇ ਵੀ ਜੰਗਲ ਦੀ ਕੁੜੀ ਆ ਬਰੋਈ ਹੋਈ ਹੈ ਹਾਂ ਆ ਆਪੇ ਸੰਜਮ ਤਬਦੀਲੀ ਆਉ ਧਰਤੀ ਦੇ ਉੱਤੇ ਧਰਤੀ ਦੇ ਕੁਛ ਲੋਕ ਰੇਗੀ ਕੇਸ਼ ਬਣ ਹੋਣ ਦੀ ਕੇਸ਼ ਸ਼ਹਿਰ ਬਣਿਆ ਤੇ ઋષਿ ਕਹਿੰਦਾ ਉਹ ਰਿਸ਼ੀ ਲੋਕ ਰਹਿੰਦੇ ਸੀ ਉਤੇ ਜੰਗਲ ਚ ਪਰ ਹਰਦوار ਤੋ ਅੱਗੇ ਜਾ ਸੰਜਮ ਵਰਤੈ ਸਵਾਮੀ ਆਪੇ ਸੰਜਮ ਵਰਤੈ ਸਵਾਮੀ ਸੰਜਮ ਸੰਜਮ ਵਰਤਣਾ ਥੋੜਾ ਕਰਕੇ ਥੋੜਾ ਇਹ ਜਿਆਦਾ ਨਹੀਂ ਰਾਹਾਂ ਦੀ ਗੱਲ ਐ ਲੋੜ ਅਨੁਸਾਰ ਕੋਈ ਚੀਜ਼ ਕਰੀ ਲੋੜ ਅਨੁਸਾਰ ਖਾਣਾ ਲੋੜ ਅਨੁਸਾਰ ਜਮਾ ਵੀ ਰੱਖਣਾ ਉਹ ਸਮਝੋ ਬਈ ਵਾਇਆ ਬਿਰੋ ਲੋੜ ਅਨੁਸਾਰ ਹੀ ਕਰੀਗਾ ਮਿੱਤਰ ਇਹਦਾ ਵੀ ਕਰਨਾ ਪਰ ਲੋੜ ਅਨੁਸਾਰ ਪਰਾਂ ਜਿੱਤੀ ਗਈ ਵੀ ਠੀਕ ਐ ਕਿ ਜੋੜਾ ਬਥੇਰਾ 56 ਜੋੜੇ ਕੀ ਕਰਦੇ ਇਹਦੇ ਚਾਰ-ਚਾਰ ਸੌ ਜੋੜਾ ਹੈ ਸਜੇਉ ਨਹੀਂ ਹੱਥ ਸਜੇ ਸੁਨਤੋੜ ਤੋ ਜਿੱਦਾਂ ਸਾਂਝੀ ਮੇ ਟੁੱਟ ਜੂ ਉੱਥੇ ਲੁਕ ਪੈਣਾ ਹੋ ਜੂ ਉਦ ਜੁੱਤੀ ਦੇ ਰੰਗ ਦਾ ਹੀ ਕਪੜੇ ਚਾਹੀਦੇ ਨੇ ਉਸੇ ਰੰਗ ਦੇ ਇਹ ਚਾਹੀਦੇ ਜਿੰਨਾ ਮਰਜੀ ਬਤਾ ਲੋ ਜੇ ਸਾਂਝੀ ਮੇ ਟੁੱਟ ਗਿਆ ਤਾਂ ਸੰਦੋਖ ਟੁੱਟ ਅਸਰ ਸੇ ਸੰਦੋਖ ਦਾ ਜੂ ਆ ਰੋ ਸਾਂਝੀ ਮੇ ਹੂੰ ਸੰਦੋਖ ਦੇ ਕ੍ਰੂਪ ਜਾਂਦਾ ਸਾਂਝੀ ਥੋੜੇ ਥੋੜੇ ਰੂਪ ਚੋਂ ਦਾ ਆਪ ਦਿਆਲ ਹੋਏ ਭਾਉ ਖੰਡਣ ਆਪ ਕਰੇ ਸਭ ਦਾ ਆਪ ਦਿਆਲ ਹੋਏ ਭਾਉ ਖੰਡਣ ਖੰਡਣ ਵਾਲਾ ਰਹਿਤ ਕਰਨ ਵਾਲਾ ਜਦੋਂ ਆਪ ਦਿਆਲ ਹੁੰਦਾ ਆਪ ਕਰੇ ਸਭ ਆਪ ਕਰੇ ਸਭ ਦਾ ਫਿਰ ਸਾਰਾ ਕੁਝ ਆਪ ਹੀ ਦੇ ਹੀ ਜਾਂਦਾ ਤੈਨੂੰ ਬੈਠੇ ਨਹੀਂ ਤੈਨੂੰ ਭੱਜਣ ਦੀ ਲੋੜ ਨਹੀਂ ਜਦੋਂ ਸੰਜਮ ਤੇ ਵਿਚ ਰਹਿਂਦਾ ਹੈ ਸੰਤੋਖ ਵਿਚ ਰਹਿੰਦਾ ਹੈ ਲੋੜਰ ਸਾਰ ਤੇ ਆ ਜਾਂਦਾ ਹੈ ਤੁਵੇਂ ਸਾਰੇ ਉਹਨਾਂ ਦਾ ਰੋਡ ਹੁੰਦਾ ਤਾ ਜੀ ਅੰਦਰੋਂ ਦੇ ਹੀ ਰਿਹਾ ਪੰਛੀ ਨੇ ਰੋਜ ਆਉਂਦੇ ਨੇ ਡੱਡ ਭਰ ਕੇ ਰਾਤ ਨੂੰ ਆ ਗਏ ਆਪਣੇ ਜਿਸ ਤਾ ਤੇ ਬਹਿ ਜਾਂਦੇ ਨੇ ਰਾਤ ਕੱਟੀ ਤੇ ਚਲੇ ਜਾਂਦੇ ਤੇ ਦੂਹੇ ਨਾਲ ਪੇਵਡ ਜਾਂਦਾ ਗੁਰਮੁਖ ਆਪ ਬੁਝਾਏ ਸੋ ਸਾਦੇ ਹੀ ਦਰਗੇ ਪਾਇਮਾ ਜਿਸ ਗੁਰਮੁਖ ਆਪ ਬੁਝਾਏ ਸੋ ਸਾਦੇ ਦਰਗੇ ਪਾਇਮਾ ਸੋ ਸਾਦੇ ਹੀ ਦਰਗੇ ਪਾਇਮਾ ਤੇ ਹੁਣ ਗੁਰਮੁਖ ਹੰਦਰ ਨਾ ਹੋ ਗਿਆ ਬੁਝਾਉਣ ਵਾਲਾ ਬਾਹਰ ਲਾ ਗੁਰਮੁਖੀ ਲੱਭਣਾ ਰਹਾ ਜੀ ਜਿਸ ਨੂੰ ਗੁਰਮੁਖੀ ਆਪ ਬੁਝਾਏ ਗੁਰਮੁਖੀ ਕਹਦਾ ਬਵੇਂ ਹੂਦੀ ਹੋਏ ਹੂਦੀ ਸੋ ਸਾਡੇ ਇਧਰ ਕੇ ਪਾਇਮਾ ਜੇ ਤੋਤੇ ਨੂੰ ਉਹ ਅਸਲ ਤੇ ਸੰਝੋ ਟੋੜ ਦੇ ਬਾਅਦ ਜੇ ਸੱਜ ਉਹ ਟੁੱਟ ਜਾਂਦਾ ਨਾ ਸਤੋਗ ਟੁੱਟ ਜਾਂਦਾ ਫਿਰ ਧੀਰੇ ਟੁੱਟ ਜਾਂਦਾ ਸਿਰ ਭਾਈ ਜਿਸ ਨੂੰ ਗੁਰਮੁਖ ਆਪ ਭਜਾਏ ਸੋ ਸਾਦੇ ਦਰਗੇ ਪਾਏ ਹਰ ਸਵਾਮੀ ਸੋ ਸੱਚਾ ਹਰ ਜਾਣ ਪੈਜ ਰੱਖਿਆ ਸੋ ਸੱਚਾ ਹਰ ਸੋ ਸੱਚਾ ਜਿਸ ਪੈਜ ਰੱਖਿਆ ਸੋ ਸੱਚਾ ਹਰ ਜਾਣ ਹਰ ਰੂਪਈ ਉਹ ਸੱਚਾਈ ਜਿਹੜਾ ਹਰ ਹੈ ਉਹ ਨੂੰ ਹਰ ਉਹ ਨੂੰ ਹਰ ਜਾਗੜ ਲੋ ਹਰ ਹੋਰ ਕੋਈ ਨਹੀਂ ਜਰ